ਸਾਧ ਸੰਗੀ ਨੂੰ ਕਰੋ ਅਨੰਦ ਗੁਣ ਗਾਵੋ ਪ੍ਰਭ ਪਰਮ ਅਨੰਦ ਸਾਧ ਸੰਗੀ ਆਪਣੇ ਮਨ ਨੂੰ ਸਾਧ ਲਓ ਬੁੱਢੀ ਨੂੰ ਕਹਿਆ ਕਲਮ ਠੀਕ ਆ ਇਹਨੇ ਇਹਨੇ ਕਿਸੇ ਜੋ ਕਬਰੀ ਛੱਡਣਾ ਸੈਨ ਤੇਰਾ ਲੋਕ ਪਰ ਲੋਕ ਖਰਾਬ ਕੀਤਾ ਹੋਇਆ ਮਾਂਚਾ ਚੱਲਿਆ ਬੜੀ ਚਤਰਾਈਏ ਦੇ ਵਿੱਚ ਗੁਰੂ ਦੀ ਗੱਲ ਬੰਨਾਣੇ ਦੀ ਨੰਦਾਂ ਮਾਂਚਾ ਚੱਲਿਆ ਚਤਰਾਈ ਕਿਨੂੰ ਨਾ ਪਾਇਆ ਪ੍ਰਾਪਤੀ ਕੁਝ ਵੀ ਨਹੀਂ ਆ ਦੇਚ ਚੱਲ ਜੋ ਚਤਰਾਈ ਬਹੁਤ ਹੈ ਦੁਇਰ ਕਹਨਾ ਚਤਰਾਈ ਇੱਥੇ ਘਣੀ ਹਰ ਜਪ ਹਿਰਦੇ ਵਾਹੇ ਹਰ ਹਿਰਦੇ ਦੇ ਵਿੱਚ ਬਾਹਰ ਬਣੇ ਬੈਠਾ ਮਨ ਇਹ ਬਾਹਰ ਬਣਾਇਆ ਹਰ ਭੂrti ਇਹ ਮੰਦੀਓ ਕਰਾਣੋਂ ਆਤਾ ਇਹ ਬਾਹਰ ਜਿਹੜਾ ਹਿਰਦੇ ਕੋ ਬਾਹਰ ਲੈ ਕੇ ਆ ਕੇ ਮੂਰਤੀ ਬਣਾਤੀ ਹੈ ਕਰਾਮਾਤ ਇਸੇ ਦੀ ਹੈ ਹਰ ਜਾ ਕੇ ਹਿਰਦੇ માં ਹੈ ਹਿਰਦੇ ਵਾਲੇ ਹੱਥੇ ਸਾਹਮਣੇ ਨੂੰ ਨਿਮੋ ਹੋਣਾ ਪੈਂਦਾ ਜਾ ਕੇ ਮੂਰਤੀ ਦਾ ਮਾਇਆ ਨੂੰ ਨਹੀਂ ਮਾਉਂਦਾ ਮਾਇਆ ਖਤਰ ਮੂਰਤੀ ਦਾ ਜਾਣਦਾ ਹਾਂਜੀ ਸਾਧ ਸੰਗੀ ਮਿਲ ਕਰੋ ਆਨੰਦ ਗੁਰ ਗਾਵੋ ਪ੍ਰਭ ਪਰਮ ਆਨੰਦ ਸਾਧ ਸੰਗੀ ਮਿਲ ਕਰੋ जिने अपना मरसाले सजखट वाले ने तकायो चलो जिना मन साधे सजखण वाले सारे साधे ओना दे बिल ओना के मिल गया सबद विच करो आनंद गुण गावो प्रभु करो आनंद गुण गावो प्रभु परम परम गुण गावो प्रभु परम आनंद प्रभु परमा परमा दादे कौन कहो हां परमा आनंद रे प्रभु ਪਰਵਦੇ ਸੰਤਤ ਪ੍ਰਭ ਖੁਦ ਹੀ ਪਰਮ ਆਨੰਦ ਦੀ ਅਵਸਥਾ ਕਹਿੰਦਾ ਹੈ ਉਹਦੇ ਨਾਲ ਬੈਠ ਜਾਣਾ ਉਹਦੇ ਕੋਲ ਪਹੁੰਚ ਜਾਣਾ ਤੇ ਦੇਸ਼ ਚਲੇ ਜਾਣਾ ਉੱਥੇ ਪਰਮ ਆਨੰਦ ਹੁੰਦਾ ਜੇ ਪਰਮ ਆਨੰਦ ਹੈ ਉੱਥੇ ਗੁਣ ਪਰਮਾਣ ਦੀ ਉਸਤਵਨਾ ਹੁਣ ਗਾਏ ਦੀ ਜਾ ਸਕਦੀ ਜਿਹੜੀ ਗੁਰਬਾਣੀ ਪੜ੍ਹਦੇ ਨੇ ਨਾ ਉਹ ਬੜੀ ਔਖੀ ਆ ਹਾਂ ਜੀ ਸ਼੍ਰੀ ਰਾਮ ਨਾਮ ਤਤ ਕਰੋ ਵਿਚਾਰ ਦੁਰਲੋਕ ਦੇਖਾ ਕਰੋ ਉਹਦਾ ਦੁਲਬ ਦੇ ਕੋਈ ਇਕਵਾਲੀ ਦੇ ਹੈ ਇਕਵਾਲੀ ਦੇ ਹੈ ਕਦਰ ਦੇ ਹੈ ਜਿਹੜੀ ਅੰਦਰ ਦੀ ਹੈ ਜੋ ਸਾਨੂੰ ਮਿਲੀ ਨਹੀਂ ਹੈ ਬਾਹਰਲੀ ਹੀ ਮਿਲੀ ਹੈ ਅੰਦਰ ਦੀ ਪ੍ਰਾਪਤੀ ਵਾਸਤੇ ਜਦੋਂ ਗਣਾ ਜਿਆਦਾ ਦਲਦੇ ਹੀ ਮਣੀ ਹੋ ਬਾਹਰਲੀ ਦੇ ਉਦੋਂ ਤੱਕ ਲੋੜਾ ਜਨਾ ਚ ਰੰਗਲੀ ਹੈ ਜੀ ਪਰਗਟ ਨਹੀਂ ਹੋਈ ਕਿਤੇ ਲਈ ਉਹ ਮਾਝਾ ਲੋਹੜਾ ਜਨਾ ਦੇ ਜਹਾਜ਼ ਨਹੀਂ ਮੜਿਆ ਇਹ ਬਾਲੀ ਦਹੀ ਅੰਦਰ ਹੀ ਰਹੀ ਤੱਕ ਪਹੁੰਚ ਨਹੀਂ ਹੋਈ ਉਹ ਤੱਕ ਪਹੁੰਚਣ ਦੀ ਗੱਲ ਇਹ ਬਾਲੀ ਦੇ ਉਹਦੇ ਤੱਕ ਉਹ ਸੁੱਕੀ ਪਈ ਜਾਣਾ ਉਹਦੇ ਹੀ ਹਾਂ ਦੋਲਬ ਦੇ ਕਾ ਅਸਲ ਜਿਹਾ ਅਧਾਰ ਉਹ ਦਹੀ ਦਾ ਹੋਣਾ ਇਹ ਬਾਲੀ ਦਾ ਨਹੀਂ ਹੋਣਾ ਦੇਹ ਗੁਪਤਾਰਾ ਰਹੁਣਾ ਦੁਲਬ ਦੇਹ ਦਾ ਕਰੋ ਧਾਰ ਨਾਮ ਨਾਮ ਦਾਤ ਕਰੋ ਵਿਚਾਰ ਦੁਰਲਭ ਦੇਹ ਦਾ ਕਰੋ ਰਾਮ ਨਾਮ ਜਿਹੜਾ ਤਤ ਹੈ ਉਹਦਾ ਜਲਦ ਵਿਚਾਰ ਕਰ ਲਈਏ ਆਪਾਂ ਉਹ ਕੀ ਹੈ ਰਾਮ ਨਾਮ ਤਤ ਤਤ ਹੈ ਰਾਮ ਨਾਮ ਕੋ ਦਾਸੂ ਹੈ ਹੋ ਜੇ ਮੈਂ ਤੱਕ ਨਹੀਂ ਸਾਡੇ ਕੋਲ ਪੰਜ ਤਤ ਐਵੇਂ ਉਹ ਪਰਬ ਤਤ ਹੈ ਉਹ ਉਹ ਕੋਈ ਹਵਾ ਨਹੀਂ ਹੈ ਜੀ ਮੂੰਹ ਤੇ ਕਹਾ ਬੋਲੇ ਹੋਇਆ ਲਫਜ਼ ਨਹੀਂ ਹੈਗਾ ਉਹ ਤਤ ਨਹੀਂ ਹੁੰਦਾ ਉਹ ਜੀ ਉਹ ਜੋ ਤਤ ਇਹ ਤਤ ਗਿਆਨ ਹੁੰਦਾ ਉਹ ਵੀ ਤੁਸੀਂ ਇਕੱਠਾ ਕਰ ਸਕਦੇ ਹੋ ਉਹਦੇ ਵੀ ਉਹ ਵੀ ਮਤਲਬ ਗਿਆਨ ਵੀ ਇਕੱਠਾ ਕੀਤਾ ਜਾ ਸਕਦਾ ਗਿਆਨ ਦਿੱਤਾ ਲਿਆ ਜਾ ਸਕਦਾ ਇਸ ਕਰਕੇ ਉਹ ਵੀ ਤਤ ਹੈ ਰਾਮਨਾਥ ਜੀ ਮੈਂ ਤਤ ਸੁਰੂ ਕਰਉ ਵਿਚਾਰ ਉਹ ਜੋ ਕੋ ਦੇਗਾ ਦੇ ਆਪਣੀ ਵੀ ਇਹ ਰੋਕਾਂ ਦੀ ਹੈ ਦੋ ਦੇ ਸਾਰਿਆਂ ਦੇ ਵਿੱਚ ਹੀ ਗਏ ਤੇ ਆਪਣੀ ਦਾ ਆਹ ਕਰ ਲਿਆ ਹੋਰ ਬਥੇਦੀ ਦੇਖੀ ਆ ਆਦਾਰ ਚਰੀ ਸਭ ਦਾ ਉਹਦਾ ਆਹ ਹਾਰ ਭਣੋ ਉਹ ਹਾਰ ਕੇ ਦੋ ਲੱਖ ਦੇ ਦੀ ਖੁਰਾਕ ਦਿਓ ਖੁਰਾਕੇ ਦਾ ਹੁੰਦਾ ਦੇਖ ਜਣੋ ਜੀ ਕੀ ਉਹਦਾ ਆਹ ਰੋਟੀ ਖਾ ਥੋੜਾ ਜਿਹਾ ਆਦਾਰ ਹੋ ਗਿਆ ਭੁੱਖੀ ਲੱਗੀ ਹੋਈ ਚਲੋ ਚਾਹੇ ਪੀ ਲਈਏ ਜਾਂ ਕੋਈ ਚੀਜ਼ ਖਾ ਲਈ ਮਾੜੀ ਮੋਟੀ ਕੁਝ ਆਧਾਰ ਕੋ ਟੈਂਬਾ ਦੇ ਆਧਾਰ ਹੋਵੇ ਅਦਾਰਸਾ ਦੀ ਖਾਕੇ ਹੁੰਦੀ ਭੁੱਖ ਬਟਾਉੜੀ ਜੋ ਭੁੱਖ ਨਾ ਉਤਰ ਆ ਉਹ ਜਿਹੜੀ ਭੁੱਖ ਆ ਉਹ ਨੂੰ ਇਹ ਸ਼ਾਂਤ ਕਰਦਾ ਜੋ ਨਾ ਉਹਨਾਂ ਦਾ ਮਾਇਆ ਦੀ ਭੁੱਖ ਸਾਰੀ ਉਹ ਨਾ ਇੱਥੇ ਹੋ ਜਾਣੀ ਖਤਮ ਹੋ ਜਾਂਦੀ ਪਦਾਰਥਾਂ ਨਾਲ ਨਹੀਂ ਹੋਣੀ ਮਾਇਆ ਦੀ ਭੁੱਖ ਬੰਦ ਹੋ ਜਾਂਦੀ ਖਿਦੇ ਹੋ ਚੀਤੀਂ ਪੂਰੀ ਤੇ ਹੋ ਚੀਤੀਂ ਨਾ ਤਾ ਅਗਰ ਨੂੰ ਜੇ ਭੁੱਖਾ ਹੈ ਤਾਂ ਪਾਣੀ ਦੀ ਦੇ ਸਾਕੇ ਇਹਨਾਂ ਦੀ ਦੇ ਅਭੁਨ ਸ਼ਾਂਤ ਜੇ ਅਗਰ ਨੂੰ ਸ਼ਾਂਤ ਕਰਨਾ ਤਾਂ ਪਾਣੀ ਦੀ ਲੋੜ ਇਹਨਾਂ ਦੀ ਤਾਂ ਜੇ ਕੋਈ ਇਹਨਾਂ ਨਾਂ ਪਾਵੇ ਹੋ ਢੜੂਕਿਆ ਕਰ ਤਾ ਜਿਵੇਂ ਜੇ ਪਾਵੇ ਇੰਨਾ ਪਾਅ ਤਿਆਗੇ ਸ਼ਾਂਤ ਨਹੀਂ ਤੇ ਪਾਣੀ ਪਾਓ ਜੇ ਸ਼ਾਂਤ ਕਰਨਾ। ਨਾ ਪਾਓ ਰਾਮੂਦ ਕੇ ਪਾਓ ਤੇ ਸ਼ਾਂਤ ਹੋਊਗੀ। ਤੋ ਲਬਦੇ ਕਾ ਕਰੋਦਾ ਜਿਨ੍ਹਾਂ ਦੇ ਅੰਦਰ ਸਿਸ਼ਾਂ ਦੀ ਅੱਗ ਹੈ ਉਹਨਾਂ ਦੇ ਅੰਦਰ ਅੰਬਰ ਦਾ ਛਿੱਟਾ ਦੋ ਉਹਨੂੰ ਗੁਰਦਾ ਛਿੱਟਾ ਦੋ ਤਾਂ ਕਿ ਸ਼ਾਂਤ ਹੋਵੇ। ਉਹਨਾਂ ਦੇ ਤਪਤ ਕੜਾ ਹੈ ਗੁਜਾਂ ਸ਼ਾਂਤ ਹੋੜ। ਜੇ ਉਪੜਦੇ ਨੇ ਥੋੜਾ ਜਿਹਾ ਵੀ ਛਿੱਟਾ ਮਾਰਦੇ ਉਪੜਦਾ ਵੀ ਬੰਦ ਹੋ ਜਾਂਦਾ। ਅਵਾਲਾ ਅਵਾਲੇ ਆਲਾ ਵੀ ਬੰਦ ਹੋ ਜਾਂਦਾ ਥੋੜਾ ਜਿਹਾ ਪਾਣੀ ਪਾਏ ਤੇ ਤੇ ਪਾਣੀ ਪਾਈ ਜਾਇਆ ਲਗਾਤਾਰ ਰੱਪੇ ਥਲੇ ਤੇ ਸ਼ਾਂਤ ਹੋ ਜਾਂਦਾ ਹੋਜੀ ਅਮਰਤ ਬਚਨ ਹਰ ਕੇ ਕੋਣ ਗਾਉਂ ਪ੍ਰਾਨ ਤਰਣ ਕਾ ਇਹ ਸੁਹਾਉ ਅਮਰਤ ਬਚਨਾ ਹਰ ਕੇ ਕੋਣ ਗਾਉ ਗਾਉ ਗਾਉ ਮਾ ਸੁ ਮੋਦਰਾਜ ਗਾਉ ਗਾਉ ਗਾਉ ਗੰਗੂ ਸਿੱਖਿਆ ਫਿਰ ਅਗਲੀ ਭਗਤੀ ਸਿੱਖਿਆ ਦਾ ਅਲੀ ਅਦੀਪੰਗਯੁਦਾ ਦੀ ਹੈ ਪ੍ਰਾਣ ਤੰਕਾ ਐਸਾ ਪ੍ਰਾਣ ਦਾ ਜੜ ਤਰ ਜਾਣਾ ਹੈ ਆਤਮਾ ਦਾ ਅੱਗੇ ਤਰ ਜਾਣਾ ਹੈ ਇਹ ਕੰਮ ਹੈ ਸਾਡਾ ਅਪਨੋਥ ਕੀ ਸੀ ਆਤਮਾ ਦਾ ਤਰਨਾ ਸੰਸਾਰ ਦਾ ਵਾਸ ਚੋਂ ਪਰੇ ਚਲੇ ਜਾਣਾ ਇਹ ਫਿਰ ਉਹਦੇ ਖਾਤਰ ਅੰਪਰਤ ਬਚਨ ਵਰਕੇ ਕੋੰਦੋ ਇਹ ਅਮਰਦਾ ਬਚਨ ਦਵਾਉਂਗੇ ਤਾਂ ਅਗਭੂ ਜੂਗੀ ਅੰਬਰ ਦਾ ਛੱਡਾ ਦੋ ਸ਼ਾਂਤ ਹੋ ਜੂਗਾ ਜਿਉਂ ਜਿਉਂ ਸ਼ਾਂਤ ਹੋ ਜੂਂ ਤੋ ਤਰਗੈ ਤੋ ਅਮਰ ਤੋਂ ਵਜਨ ਹਰ ਕੇ ਕੋਲ ਗਾਓ ਪ੍ਰਾਣ ਧਰਮ ਕਾ ਇਹੇ ਸੋਲ ਇਹੋ ਸੋਲ ਇਹੇ ਲੋੜ ਹੈ ਸਾਡਾ ਅਸਲ ਚ ਸਰੀਰ ਨਾ ਨਹੀਂ ਦਰਨਾ ਸਰੀਰ ਨਾ ਨਹੀਂ ਦਰਨਾ ਪ੍ਰਾਣ ਕੀ ਨੇ ਜੋਤ ਪ੍ਰਾਣ ਹੈ ਸਰੀਰ ਦੇ ਅਸਲ ਚ ਉਹ ਪ੍ਰਾਣ ਵాయੂ ਕਹਿੰਦਾ ਕੇ ਜਿੰਨਾ ਜੇ ਜੋਤ ਹੈ ਸ਼ਰੀਰ ਜਿਉਂਦਾ ਬਣਦਾ ਸਾਲਾਂ ਜਿੰਨਾ ਹੁੰਦਾ ਸ਼ਰੀਰ ਤੇ ਸਾਲਾਂ ਜਿੰਨਾ ਹੁੰਦਾ ਉਹ ਕਰਮ ਵਿੱਚ ਕਮੇਸ਼ਾ ਹੁੰਦਾ ਕਰਮ ਵਿੱਚ ਕਿਵੇਂ ਜਾਂਦਾ ਜਿਹੜਾ ਸਾਨੂੰ ਸਾਹ ਆਉਂਦਾ ਜਿਉਂਦਾ ਰੱਖਣ ਦਾ ਨਹੀਂ ਆਉਂਦਾ ਹੌਸਲ ਦੇ ਵਿੱਚ ਉਹਦਾ ਆਕਸੀਜਨ ਹੈ ਸਾਲਾਂ ਇਹ ਖੂਨ ਨੂੰ ਸਾਫ ਕਰਨ ਵਾਸਤੇ ਉਹਦੀ ਲੋੜ ਹੈ ਇਹ ਤਾਂ ਦਰਮਿਆ ਵਿਚ ਹੁੰਦਾ ਨਹੀਂ ਉਹ ਬਹੁਤ ਨਹੀਂ ਉੱਥੇ ਕਿਵੇਂ ਆ ਤਾਂ ਇਹਦੇ ਅਸਲ ਦੇ ਵਿੱਚ ਜੋਤ ਦੇ ਪ੍ਰਾਣਾ ਸਰੀਰ ਦੇ ਪ੍ਰਾਂਤ ਕਰਨ ਗਏ ਤੇ ਉਹ ਦੱਸੇ ਤੇ ਪ੍ਰਾਂਤਾਂ ਦਾ ਆਪ ਕੀ ਕਰਾਂ ਤੁਸੀਂ ਇਹਨੇ ਤਰਨਾ ਪ੍ਰਾਣ ਅਵੰਨ ਕਰਨਾ ਜੋਤ ਨੇ ਕਰਨਾ ਜੋਤ ਨੇ ਕਰਨਾ ਉਹ ਮਾਰ ਫਸਿਆ ਮਾਇਆ ਜੋ ਇਹਨੇ ਕਰਨਾ ਉੱਪਰ ਮਨ ਮਾਇਆ ਵਿੱਚ ਫਸ ਰਹੇ ਹੋ ਇਹਨੇ ਬਾਹਰ ਕੜੇ ਦੇ ਉੱਪਰ ਰਹਿਣਾ ਮਾਂ ਜੋ ਥਰੂ ਬੈ ਗਈ ਹੈ ਮਾਂ ਜੋ ਥਰੂ ਬੈਗਾ ਗਿਆ ਐ ਤੇ ਨਾਲੇ ਦੀ ਬਾਤ ਮਾ ਉਹ ਨਾਲ ਸਰੀਰ ਜਿਉਂਦਾ ਇਹ ਸਰੀਰ ਦੇ ਪ੍ਰਾਣ ਦੀ ਗੱਲ ਆ ਹੁਣ ਚੜ ਸਰੀਰ ਦੇ ਇਹ ਨਹੀਂ ਵਾਤਾ ਭੁੰਦਾ ਜਿਹਨੇ ਜਿਹਨੇ ਤੋ ਹੂਰ ਹੋ ਜੁਣਦਾ ਜਿਹਨ ਜੀਵਤ ਹੈ ਬਾਣੇ ਸਤਿ ਸ਼੍ਰੀ ਅਕਾਲ ਪਾਣਾ ਦਾ ਪ੍ਰਭ ਜੀ ਪਿਛਲਾ ਆਧਾਰ ਮੰਦਾ ਦਾ ਰੈਜਾ ਪ੍ਰਾਣਾ ਦਾ ਮੰਦਾ ਦਾ ਕੋਣ ਜਿੱਦਿ ਜੋਤਾ ਪ੍ਰਭ ਜੀ ਸੱਚਾ ਨਾਮ ਹੀ ਰਾਲਾ ਰੂਪ ਹੈ ਸਾਡਾ ਮੇਰਾ ਆਧਾਰ ਉਹ ਸ੍ਰੀ ਦਾ ਮੇਰਾ ਆਧਾਰ ਸਾਡਾ ਆਧਾਰ ਉੱਥੇ ਪ੍ਰਭ ਦਾ ਆਧਾਰ वो ਕੋਈ ਖੋਨਦਾ ਜਾਂ ਇੱਕ ਹੋ ਕੇ ਬਾਦ ਦੇ ਵਿੱਚ ਨਾਮਾਧਾਰ ਬਣਦਾ ਹੈ ਅੱਦੇ ਦਾ ਆਧਾਰ है ਹੈ ਅਜੋ ਜੀ ਬਤਨਾ ਹੈ ਜਦੋਂ ਮਾਇਆ ਜਫਸ ਹੈ ਉਹਦਾ ਆਧਾਰ ਕੀ ਪ੍ਰਭ ਹੈ ਪ੍ਰਭ ਆ ਮਾਇਆ ਤੋਂ ਬਾਹਰ ਹੈ ਉਹਦੇ ਨਾਲ ਜੁੜ ਕੇ ਮਾਇਆ ਤੋਂ ਬਾਹਰ ਹੀ ਰਹਿ ਸਕਦਾ ਹੈ ਜੇ ਹੋਸ਼ ਵਿੱਚ ਰਹਿਣਾ ਨੇ ਤੇ ਬੇਹੋਸ਼ ਹੋ ਜੂਗਾ ਸਰੀਰ ਛੱਡ ਕੇ ਜੇ ਪ੍ਰਾਬੰਧ ਹੋ ਜੂਏ ਹੈ ਤੇ ਜੀ ਗੱਡੇ ਤੇ ਬਾਹੋਸ਼ਾ ਨਾ ਕਿਉਂਕਿ ਪ੍ਰਾਬੰਧ ਹੋ ਸਕੂ ਔਰ ਹੋਸ਼ਾ ਤੇ ਹੋਈ ਤਾਂ ਫਰਕਾ ਹੋਰ ਕੁਛ ਨਹੀਂ ਜੇ ਹੋ ਜਾ ਤਾਂ ਜੰਦਾ ਜੇ ਨਹੀਂ ਹੋਇ ਤਾਂ ਮਰਿਆ ਹੋਇਆ ਜੇ ਹੋਇਆ ਜਾਗਦਾ ਤਾਂ ਜੰਦਾ ਜੇ ਸੁੱਤਾ ਪਿਆ ਤਾਂ ਮਰਿਆ ਹੋਇਆ ਸਰੀਰ ਸਾਡੀ ਸਾਹ ਤ੍ਰਿਕੁਣੀ ਸਾਡੀ ਸਾਰੇ ਸੌ ਜਾਂਦਾ ਹੈ ਚਾਹੇ ਤੂੰ ਸੌਂਵੇਂ ਜਾਂ ਰਾਤ ਨੂੰ ਸੌਂਵੇਂ ਜਨਾਜ਼ਾ ਜੇ ਜਾਮ ਅਜ ਰੁਕਦਾ। ਜਦ ਤਰਕੁੜੀ ਛੁੱਟ ਗਈ ਹਲਕ ਤੇ ਥੱਲੇ ਗਿਆ ਜਦ ਸੌਂ ਗਿਆ। ਸੌਂ ਗਿਆ ਫਿਰ ਨੂੰ ਪਤਾ ਹੀ ਨਹੀਂ ਕਿ ਕਿੱਥੇ ਕਿੱਥੇ। ਉਹ ਜੀਵ ਨਹੀਂ ਬੱਲੇ ਜਾ ਸਕਦਾ। ਉਹ ਨਹੀਂ ਬੱਲੇ ਜਾ ਸਕਦਾ। ਅਸੀਂ ਆਪ ਨਹੀਂ ਮੰਨਦੇ। ਪਤਾ ਹੀ ਨਹੀਂ ਕਿ ਗਿਆਨ ਨਹੀਂ। ਜਿਹੜੀ ਜੀ ਦਾ ਗਿਆਨ ਨਹੀਂ ਉਹ ਜੀਵ ਜੇ ਪ੍ਰਾਣਾਂ ना ਹੋਇਆ ਹੈ ਪ੍ਰਭ ਜੇ ਸਤਗੁਰ ਨਾਲ ਜੁੜਿਆ ਸਤੁਰ तो ਹੈ ਉਹ ਤਾਂ ਜਾਗ ਤੇ ਕੋ जागता ਬਲੇ ਜਦ ਜਾਗ ਜਾਂਦਾ ਜਾਗ ਤੇ ਉਹ ਬਰ ਜਾਂਦਾ ਫਿਰ ਉਤਰਿਆ ਹੋਇਆ ਹੈ ਪ੍ਰਾਣ ਤੜਲ ਹੋ ਗਿਆ ਜਦ ਉਹਨੇ ਗਾਲ ਸ਼ਬਦ ਗੁਰੂ ਨਾਲ ਜੁੜਦੇ ਅਸਲੀ ਪਰਮ ਨਾਲ ਨਾ ਫੇਰੇ ਫੁੱਟਣ ਇਹ ਕੋਣਾ ਹੋਰ ਗੱਲ ਹੈ ਕੋ ਜਦ ਇਹ ਕੋਂਦਾ ਫਿਰਦਾ ਇਹ ਦੱਸਦਾ ਪ੍ਰਾਨ ਇਹ ਤਾਂ ਇਹ ਹੀ ਦੱਸਦਾ ਜੀ ਦੱਸਦਾ ਚਾਇਕੋ ਕੇ ਉਗਦਾ ਸਾਰਾ ਟਬਰੇ ਦੱਸਦਾ ਸਾਰਾ ਟਬਰੇ ਦੱਸਦਾ ਸਾਦ ਗੋਟ ਤੁਹਰੇ ਕਾਲ ਸਵਾਰੇ ਹਾਂ ਜੀ ਅਮਰਤ ਬਜਰ ਹਲਕੇ ਗੋੜ ਗਾਓ ਪ੍ਰਾਨ ਤਰਵ ਕੇ ਇਹੇ ਸੁਆਓ ਉਪਰ ਬਚਨ ਇਸ ਕਰਕੇ ਜਿਹੜੀ ਇੱਕ ਹੋਰ ਇਹ ਬਥੇ। ਉਹ ਤੇ ਨਿਰਮੇਤੀ ਉਹਦਾ ਬੰਦ ਕਹਿੰਦਾ ਅਸਲ ਮਿਰਤੀ ਸੰਸਾਰ ਤੋਂ ਹੈ। ਸੰਸਾਰ त्याਗਣਾ ਹੈ। ਆਇਆ ਸੰਸਾਰ ਤੇ ਛੱਡਣਾ ਗਾ। ਜੇ ਤੋੜ ਲੈ ਸੰਸਾਰ त्याਗਾ ਕੇ ਇਹ ਨੂੰ ਵਰਨਾ ਕਹਿੰਦੇ ਨੇ ਹੋਰ ਦੀ ਕਰਾਂਗੇ। ਸੰਸਾਰੀ ਲੋਕ ਇਹ ਸਾਨੂੰ ਮਰਨਾ ਕਹਿੰਦੇ ਨੇ। ਉਹਨਾਂ ਭਾਵੇਂ ਦਾ ਮਰਦਾ ਆ। ਉਹਨਾਂ ਦਾ ਸੰਸਾਰੀ ਨਾ ਸੰਧਾਰੀ ਜੀਵਨ ਦੀ। ਤੂਹ ਜੀ ਮੰਦੋਲ ਨੂੰ ਪਤਾ ਹੀ ਨਹੀਂ। ਬਾਨੀ ਆਹ ਪਹਿਰ ਪ੍ਰਭ ਦੇਖੋ ਨੇਰਾ ਮਿਟੇ ਗਿਆਨ ਬਿਨ ਸੇ ਅੰਧੇਰਾ ਆਠ ਪੈਰ ਪ੍ਰਭ ਦੇਖੋ ਨੇਰਾ ਅਠੇ ਪੈਰ ਪ੍ਰਭ ਨੂੰ ਹਾਜ਼ਰ ਨਾਜ਼ਰ ਸਮਝੋ ਉਹ ਜੇ ਸਰਵ ਵਿਆਪੀ ਤੁਸੀਂ ਗੈਰ ਹਾਜ਼ਰ ਕਿਵੇਂ ਸਮਝ ਲਓ ਜੋ ਜੀ ਅਸੀਂ ਸੁਣੀ ਐ ਤੇ ਉਸ ਉੱਤੇ ਆਜਾ ਨਾਜ਼ਰ ਨੂੰ ਨਾ ਦੇਖੋ ਦਾ ਮਤਲਬ ਮੰਨੋ ਬੇੜਾ ਦੇਖੋ ਉਹਨੇ ਮੰਨ ਮੰਨੋ ਬੁੱਧ ਕੇ ਰਹੋ ਨੇੜਾ ਕਦੇ ਵੀ ਨਾਇਕ ਕੋ ਲੋਬੀਓ ਨੇੜੇ ਹੈ ਜੀ ਜੇ ਕੋਈ ਨੇੜਾ ਬੰਦਾ ਹੋਵੇ ਗੋਲਕਵਲ ਨੂੰ ਹੱਥ ਜਾਂਦਾ ਹੀ ਨਹੀਂ ਕਿ ਸੌਦਾ ਨੋੜਿਆ ਪੰਥੋ ਦਾ ਗੱਲਣਾ ਯਾਕਨ ਤੀ ਵੇ ਤਸਲ ਕੋ ਨਾ ਜਾਊਗਾ ਸਾਰਾ ਲੱਗਦਾ ਤਾਂ ਇਹ ਗੱਲ ਮੈਂ ਤੇਰੀਆਂ ਕਹਿੰਦੇ ਨੂੰ ਕਈ ਰਮਾਲੇ ਦੇ ਕੇ ਟੱਕੇ ਰੱਖੋ ਬਣੇ। ਮਸਜਿਦ ਦੇ ਆਠ ਪਹਿਰ ਤੋਂ ਖਾਸ ਕਰੋ ਬਹੁਤੀ ਵਿਆਖਿਆ ਨਾ ਕਰੇ ਕਰੋ। ਬਹੁਤੀ ਵਿਆਖਿਆ ਹਾਂਜੀ ਆਠ ਪਹਿਰ ਪਰਮ ਵੇਖੋ ਮੇਰਾ ਮਿੱਤੇ ਗਿਆਨ ਬਿਨਸ਼ੇ ਹੁੰਦੇ ਆ। ਬਿਟੇ ਗਿਆਨ। ਪਰ ਜੇ ਇਹ ਨਿਹਰਾ ਜੇ ਅ ਗਿਆਨ ਮਿਟਾਉਣਾ ਹੁੰਦਾ ਨੇਰੇ ਦਾ ਇਲਾਜ ਕਰਨਾ ਹੁੰਦਾ ਤਾਂ ਕਰ ਲੈਂਦੇ ਪਰ ਨਾ ਇਹਨਾਂ ਨੇ ਨੇਰੇ ਦਾ ਇਲਾਜ ਸੰਗਤ ਦਾ ਕਰਨਾ ਨਾ ਆਪਣਾ ਕਰਨਾ ਸੰਗਤ ਨੂੰ ਵੀ ਨੇਰੇ ਚ ਰੱਖਣਾ ਹੈ ਜਾਂ ਰੱਖਣਾ ਹੋਰ ਤਾਂ ਆਪ ਤੌੜੂ ਜੇ ਪਤਾ ਵੀ ਹੋਵੇ ਆਦਮੀ ਨੇਰੇ ਜੋ ਰੱਖਦਾ ਹੈ ਉਹ ਆਪਣੇ ਰਹਿਣਾ ਹੋਵੇ ਨਹੀਂ ਤਾਂ ਗੱਪੀ ਨੇ ਜਿਵੇਂ ਪਤਾ ਲੱਗਦਾ ਜਿਵੇਂ ਚਾਹਨਾ ਚਾ ਵੜਦੇ ਨੇ ਦੋਏ ਨਹੀਂ ਤਾਂ ਜਦੋਂ ਪਤਾ ਲੱਗਦਾ ਜਾਂ ਸਾਡੇ ਪੂਰੇ ਆ ਜਾਂਦਾ ਸਖਰੀ ਦਾ ਮਾਲ ਲੈ ਕੇ ਥਾਂ ਜਵਰ ਦਾ ਜੱਜ ਪਤਾ ਲੱਗਦਾ ਵੀ ਉਹਦਾ ਕੋਈ ਸਾਲਾਂ ਦੇ ਕਦੇ ਆ ਬੜੇ ਤਾਂ ਇਹ ਪਤਾ ਨਾ ਹੋਵੇ ਜੇ ਪਤਾ ਵੀ ਥਾਣਾ ਕਿੱਥੇ ਹੈ ਕਿਹੜੇ ਬਾਜ਼ਾਰ ਚ ਠਿੱਕਦੇ ਜਾਂਦਾ ਉਹਨੂੰ ਉਹ ਲੋਕਾਂ ਨੂੰ ਜਾਂਦਾ ਅਗਿਆਨਤਾ ਦੇ ਵਿੱਚ ਰੱਖਣਾ ਹੀ ਇਹਨਾਂ ਦਾ ਠਿਕਾ ਸੀ ਆਠ ਪ੍ਰਭ ਆਠ ਪ੍ਰਭ ਪ੍ਰਭ ਦੇਖੋ ਨੇੜਾ ਰੱਬ ਦੇਖੋ ਨੇੜਾ ਮਿਟੇ ਅਗਿਆਨ ਵਿਰਸੇ ਹੁੰਦੇ ਰਾ ਇੰਨੇ ਗੱਲਾਂ ਨਾਲ ਅਗਿਆਨਤਾ ਮਿਟ ਜੂਗੀ ਇਹਦੇ ਚਲਾ ਜਾਊਗਾ ਲੋ ਇਹ ਤਾਂ ਉਹ ਖੰਦੇ ਜੀ ਫਾਰਮੂਲਾ ਆਹ ਇੰਨੀਆਂ ਗੱਲਾਂ ਨੇ ਛੱਡ ਦਿੰਦੇ ਇਸ ਤਰ੍ਹਾਂ ਆਹ ਦੇ ਤਰ੍ਹਾਂ ਬਿਠੇ ਹੀ ਬਾਕੀ ਲੋੜੇ ਨੀ ਵਾਲੀ ਬੰਦ ਦੀ ਕੋਈ ਇੰਨੀ ਬਹੁਤ ਹੈ ਉਹ ਜਿਵੇਂ ਕਹਿੰਦਾ ਵੀ ਉਹ ਅਨਵਲ ਕਹਿੰਦੇ ਵੀ ਦੋ ਟੱਪੇ ਬਥੇਰੇ ਨੇ ਦੋ ਟੱਪੇ ਯਾਦ ਰੱਖ ਲੋ ਅੱਠ ਪੈਰ ਨੂੰ ਹਜਰ ਨਾਜਰ ਸਮਝੋ ਦੇਖਾ ਪਹਿਲਾਂ ਕੋਈ ਵੀ ਗਲਤੀ ਕਰਦਾ ਪਾਪ ਹੋ ਜਾ ਗਲਤੀ ਕਰਕੇ ਦੇਖੋ ਫਿਰ ਗਲਤੀ ਨਹੀਂ ਕਰ ਸਾਡੇ ਅਗਿਆਨਤਾ ਦੀ ਗਲਤੀ ਕਰਦੇ ਨਾ ਜਾਂ ਅੱਠ ਪੈਰ ਨੇੜੇ ਆ ਗਿਆ ਤਾਂ ਹੋਈ ਨਹੀਂ ਸਕਦਾ ਬਜ਼ਾ ਅੰਦੇਰਾ ਅੰਦੇਰਾ ਜਿਵੇਂ ਗਿਆਨ ਦਾ ਸਵਧਾ ਨਾਸ ਹੋ ਜੂਗਾ ਗੁਰਪ੍ਰਸਾਦ ਪਰਪ ਦਾ ਨਾਸ ਹੋਏ ਸੋ ਸੁਣੋ ਉਪਦੇਸ਼ ਹਿਰਦੇ ਪਸਾਵੋ ਮਨ ਇੱਛੇ ਦਾਨ ਕਫਲ ਪਾਵੋ ਜੇ ਤੋ ਘਾ ਹੋਰ ਕੁਝ ਕਰਨਾ ਜੇ ਤੋ ਘਾ ਜਾਣਾ ਆ ਜਿਹੜੇ ਉਪਦੇਸ਼ ਸੁਣਦੇ ਹੂੰ ਗੁਰਬਾਣੀ फेर ਕੀ ਹੋਊਗਾ ਬੰਨ ਇਛੇ ਨਾਨਕ ਬਾਲਾ ਬਾਨੇ ਇਛੇ ਨਾਨਕ ਬਾਲਾ ਬਾਬੋ ਫਿਰ ਉਹਦੀ ਚੱਕੀ ਹੋ ਫਿਰ ਬਾਨੇ ਇਛੇ ਫਰ ਫਰਵਾਹੀ ਪ੍ਰਾਪਤੀ ਹੋ ਜੋ ਬੰਗੜਾ ਕਰੋ ਬਾਨੇ ਕੋਈ ਸੋਈ ਸੋਈ ਦੇਵਾ ਲੱਗ ਪੰਕਤੀਆਂ ਨੇ ਸਰ ਕੋਈ ਬਹੁਤੀ ਲੰਬੀ ਚੌੜੀ ਗੱਲ ਹੈ ਨਹੀਂ ਸੁਣੋ ਬਦੇਸ ਜਿਹਦੇ ਬਸਾਉਂਦੇ ਰੋਲ ਉਹ ਬਦੇਸ ਹੁੰਦੇ ਆ ਫਿਰਦਾ ਜੀ ਬਸਾਉਣ ਦੀ ਗਲਤੀ ਨਹੀਂ ਕਰਦੇ ਇਸ ਕਰਕੇ ਬਚੇ ਹੋਏ ਉਹਦੇ ਰੋਲ ਹੁੰਦੇ ਆ ਫਿਰਦਾ ਜੀ ਬਸਾਉਣ ਨਹੀਂ ਗਲਤੀ ਨਹੀਂ ਕਰਦਾ ਅਸਲ ਦੇ ਵਿੱਚ ਹਰਦਾ ਜੀ ਤਾਂ ਬਸ ਜਾਂਦਾ ਠੱਕੇ ਨਾਲੇ ਬਸ ਜਾਂਦਾ ਜਿਹਦੇ ਹੱਥ ਠੀਕ ਕਰਦੀਏ ਅਸੀਂ ਆਥੇ ਠੀਕ ਨਹੀਂ ਕਰਦੇ ਹੁੰਦੇ ਜੇ ਵਸਣਾ ਜਾਵੇ ਖਤਰਾ ਹੈ ਖਤਰਾ ਇਹ ਹੈ ਜੇ ਆਪ ਸਹੀ ਕਰਦੇ ਧੱਕੇ ਨਾਲੇ ਇਧਰ ਜਾਵਣੇ ਨੇ ਕੁਰਬਾਨੀ ਦੇ ਕੁਰਬਾਨੀ ਦੇ ਅਰਥ ਧੱਕੇ ਨਾਲੇ ਇਧਰ ਜਾਵਣੇ ਨੇ ਜੇ ਸਹੀ ਕਰ ਅਸੀਂ ਇਹ ਗਲਤੀਓ ਨਹੀਂ ਕੀਤੀ ਜੇ ਸਹੀ ਹੱਥ ਦਸੀਏ ਸਮਝਾ ਸੱਚ ਬੜੋ ਬੜੀ ਮੰਨ ਸੱਚ ਨੂੰ ਮੰਨ ਲੈਂਦਾ ਜੇ ਸਾਚੀ ਜਾਤੀ ਹੈ ਬਰੋਗਦੀ ਮਨ ਮੰਗ ਲੈਂਦਾ ਸਦਾ ਮੋਟਾ ਮੋਟੇ ਢਿੱਕੇ ਕਰਾਦੇ ਦੋ ਉਹਨਾਂ ਵੀ ਉਹੜੀ ਹੀ ਹੋਰ ਪਹਿਲਾਂ ਦਾ ਉਂ ਕਰਦੇ ਸਨ ਹੱਥ ਆਪਣੀ ਸੰਤ ਤਰੂ ਮੀਣ ਉਹ ਦੋਈ ਗੁਰੂ ਆਲੀ ਸੰਤ ਤਰੂ ਵੀ ਢਿੱਕੇ ਦੇ ਕਰਕੇ ਸਾਰਿਆਂ ਦੇ ਕੋਈ ਰੰਗ ਜੋੜ